हां तिस जाने के पूछो हर कर तिस जानदे पांच ता अपना तेना लव भी आया फिर हां मन मेरे तिन की ओर ले तिन ਤਿੰਨ ਜਨ ਦੇ ਸਤਿ ਸ੍ਰੀ ਅਕਾਲ ਨੰਨੁਸਾਰੀ ਤਾਂ ਨਾ ਇਹ ਸਤਿ ਸ੍ਰੀ ਨਾ ਨੰਨਾ ਮੁਕਤਾ ਜੀ ਰੇਂ ਜਾਂਦੇ ਨਹੀਂ ਹਾਂ ਤਿੰਨ ਜਨ ਦੇ ਤਿੰਨ ਨਾਮ ਮੇਰੇ ਤਿੰਨ ਵੀ ਓਟ ਜਨਾ ਕੇ ਜਦ ਕਿ ਲੈ ਉਹ ਤੇ ਸ਼ਾਇਰੀ ਨਹੀਂ ਚੱਲੇ ਤੈਨੂੰ ਤੇ ਜਿਹੜਾ ਹੁੰਦਾ ਇੱਕ ਵਜਨ ਹੁੰਦਾ ਤੇ ਜਿਹੜਾ ਅਲਮਦਾ ਹੈ ਉਹ ਬਹੁਤ ਜਦ ਹੀ ਸਾਨੂੰ ਤੰਗਣੀ ਲੱਗੀ ਹੈ ਸ਼ਾਇਰੀ ਉਹ ਬਹੁਤ ਜਾਈ ਬਹੁਤ ਜਾਈ ਇੱਕ ਗੱਲ ਹੈ ਉਹ ਖਾਸੀ ਸਿੰਗਣ ਬਹੁਤ ਲੰਮੀ ਹੋ ਜਾਂਦੇ ਜਿਆਦਾ ਕੀ ਕੀ ਫਿਰ ਲੰਮੀ ਸਾਖੀ ਕੀ महामहु कौर तुम्हारी थै से तनुना धीरे गी गुरु जी गुरु जी ओकाना महा विजय सन्ना का लाभगा अर्थो ही रहू जोसी कीता सारी बदली जाते सिर्फ के ले प्रवान का मतलब अर्थो ही रहने के बदल अर्थ नहीं बदलता अस बदल के बड्डी जोर कोई मतलब फ्री तो ही नहीं है ਤੈਨਾਂ ਦਾ ਫਲ ਤੈਨਾਂ ਨੂੰ ਤੇ ਤਨ ਜਿਲੇ ਵਰਵਾਂ ਤੈਨਾਂ ਨੂੰ ਜਿਲੇ ਵਰਵਾਂ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤੇਸ ਦਾ ਨਾਮ ਇਸਕੇ ਸੰਗ ਸਿੱਖ ਉਤਰੇ ਨਾਨਕ ਹਰਿਗੁਰ ਗਉ ਸਤਿਪੁਰਖ ਜਿਨ ਜਾਣਿਆ ਸਤਿਗੁਰ ਤੇਸ ਦਾ ਨਾਮ ਉਹਨੂੰ ਕਹਿ ਸਕਦੇ ਆਂ ਜੀ ਬਿਨੈ ਸਤਿਗੁਰ ਤੋਂ ਜਾਣ ਲਿਆ ਹੋਵੇ ਇਹ ਤੁਹ ਕਹਿਣਾ ਪਿਆ ਕੋਈ ਸਤਿਗੁਰ ਤੇ ਖਾਲੀ ਕੋਈ ਨਹੀਂ ਲਿਖਿਆ ਹੈ ਸਤਿਗੁਰ ਸਾਰਿਆਂ ਦੇ ਅੰਦਰ ਔਰ ਜਦ ਸਤਿਗੁਰੋਂ ਅੱਲਾ ਪ੍ਰਗਟ ਹੁੰਦਾ ਸਤਿਗੁਰ ਕਿੱਥੇ ਹੈ ਸਾਰਿਆਂ ਦੇ ਸਤਿਗੁਰ RAM ਵਰਬ ਜੈ ਵਰਬ ਦੇ ਅੰਦਰ ਉਹ ਜਿਸ ਵਰਪਗਾ ਨੇ ਉਹ ਸਤਿਗੁਰ ਹੈ ਇਹਨੂੰ ਪ੍ਰਭ ਗਾਨੇ ਉਹ ਹੀ ਸਤਿਗੁਰਾ ਜਦੋਂ ਸਤਿਗੁਰ ਦਾ ਜਨਮ ਹੋਣਾ ਪਰ ਉਹ ਅੰਡੇ ਚੋਂ ਬਾਹਰ ਆਉਣਾ ਫਿਰ ਇਹ ਸਤਿਗੁਰਾ ਫਿਰ ਇਹ ਸਤਿਗੁਰ ਪ੍ਰਗਟਾ ਦੁਨੀਆ ਵਿੱਚ ਫਿਰ ਬਾਹਰ ਲਿਆਂਦਾ ਵੀ ਸਤਿਗੁਰਾ ਆਪਣਾ ਦਾ ਹੋਇਆ ਬਾਹਰ ਲਿਆਂ ਵਾਸਤੇ ਵੀ ਸਤਿਗੁਰਾ ਆਪਣਾ ਦਾ ਹੈ ਹੀ ਹੈ ਆਪਣਾ ਦਾ ਆਪਣਾ ਨੇ ਜਾਣੇ ਸਤਿਗੁਰ ਪਰੋਂ ਪ੍ਰਗਟ ਰੂਪ ਸਤਿਗੁਰ ਕਹਿ ਸਕਦੇ ਆ ਬਾਹਰ ਦੇ ਨਾਲ ਪ੍ਰਗਟ ਹੋ ਗਿਆ ਸਤਿਗੁਰ ਅਸਲ ਨੇ ਵੀ ਜਨਮ ਦਾ ਮਤਲਬ ਪ੍ਰਗਟ ਹੋ ਜਾਣਾ ਜੀ ਬੱਚਾ ਅੰਡੇ ਦੇ ਵਿੱਚ ਹੈਗਾ ਬਾਹਰ ਪ੍ਰਗਟ ਨਹੀਂ ਹੋਇਆ ਪ੍ਰਗਟ ਹੋ ਕੇ ਉਹਦਾ ਰੂਪ ਦਾ ਪਤਾ ਲੱਗੂਗਾ ਅੰਡੇ ਦੇ ਵਿੱਚ ਨਹੀਂ ਜੋ ਬੋਲੂ ਦਾ ਗਿਆਨ ਕੀ ਹੈ ਉਹ ਰੰਗ ਰੂਪ ਗਿਆਨ ਦੇ ਵਿੱਚ ਉਹ ਵੀ ਜਨਮ ਹੈ ਬੋਲੂ ਵਿੱਚ हां ਹੋਈ ਜਾਂ ਬੋਲਣ ਤੇ ਗਿਆਨ ਹੈ ਬੋਲਣ ਦੇ ਰੂਪ ਹੈ ਰੰਗ ਰੂਪ ਬੋਲਣ ਦੇ ਵਿੱਚ ਜਾਂਦੇ ਵਿੱਚ ਗਿਆਨ ਦਾ ਰੂਪ ਗਿਆਨ ਦੇ ਰੰਗ ਉਹ ਆਪਣਾ ਰੂਪ ਦਿਖਾਊਗਾ ਆਤਮ ਦਰਸ਼ਨ ਕਰਾਉ ਆਪ ਆਪਣਾ ਰੂਪ ਕੀ ਆਤਮ ਦਰਸ਼ਨ ਕਰਾਊਗਾ ਉਹਦੀ ਜਰੂਰਤ ਹੈ ਨਾੜਿਕ ਗੁਰਮੁਖੀ ਦੇਖ ਪਹਿਲਾਂ ਤਾਂ ਉਹਨੇ ਆਪਣਾ ਆਪ ਦੇਖਿਆ ਫਿਰ ਦੂਸਰੂ ਦਾ ਮਤਲਬ ਦੇਖਿਆ ਗੁਰੂ ਦਾ ਤਾਂ ਉਹਦੇ ਬਾਣੀ ਉਹ ਆਏ ਦਿਖਾਊਗਾ ਦੱਸੂਗਾ ਜੀ ਤਾਂ ਇਹ ਕਹਿੰਦਾ ਸਤਿਪੁਰਖ ਜਨ ਜਾਣਿਆ ਜਾਣਿਆ ਜਾਣਿਆ ਜੋ ਜਾਣਿਆ ਉਹ ਹੀ ਵਿਦਿਆ ਦੇਦੇ ਉਹ ਹੀ ਉਹ ਜੇ ਜਾਣਿਆ ਸਤਿਪੁਰਖ ਜਾਣਿਆ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਇੱਕ ਨੂੰ ਜਾਣ ਲਿਆ ਤੇ 3 ਪਰਖਤੇ ਨਾਲ 17 ਪਰਖੇ ਆ ਇੱਕ ਵਿੱਚ ਮਤਲਬ ਵਾਹ ਪਰਖੇ ਚੱਲਦੇ ਆ 17 ਪਰਖੇ ਆ 17 ਪਰਖੇ ਆ ਤੋਂ ਉੱਪਰ ਦਾ 7 ਪਰਖ ਤੇ ਬਰਾਣਾ ਕੋਈ ਅੱਗੇ ਆਊਗਾ ਫੋਕਮਣ ਵਾਲੇ ਮਹਾਗੁਰ ਘਰ ਹੈ ਜਿਹੜੀ ਕਲੈਕਟਿਵ ਸ਼ਕਤੀ ਹੈ ਸਾਰੀ ਅੱਜ ਖਣ ਦੀ ਦਾ ਨਾਮ ਸਾਰਿਆਂ ਦੀ ਸ਼ਕਤੀ ਦਾ ਨਾਮ ਗੁਰਪੁਰਖ ਜਿਹਦੇ ਸਾਰੇ ਪਰਸਨ ਦੀ ਹਿੱਸੇ ਉਹ ਸ਼ਕਤੀ ਦੇ ਅਧਿਆਨ ਸਾਰੇ ਪਰਸਨ ਉਸ ਬਾਣੇ ਦੇ ਵਿੱਚ ਸਾਰੇ ਨੇ ਬਾਣੇ ਉਹ ਕੋਮੇ ਜਿਹੜੀ ਸ਼ਕਤੀ ਹੈ ਕਲੈਕਟਿਵ ਕਲੈਕਟਿਵ ਸੋਚ ਦੀ ਜਿਹੜੀ ਸ਼ਕਤੀ ਹੈ ਉਹਦਾ ਨਾਮ ਆਪੁਰਖਾ ਇਹ ਕਿਹਨੂੰ ਜੀ ਗੱਲ ਕਰ ਰਹੇ ਪਾਉਂਦੀ ਨੇ ਆਪਣਾ ਸਭ ਉਹ ਤਾਂ ਇਹਦਾ ਕੁਝ ਹੁੰਦਾ ਰਹੂਗਾ ਹੁੰਦਾ ਰਹੇ ਕਿਤੇ ਸਮਝਾਇਆ ਉਹਨਾਂ ਨੇ ਕਿਤੇ ਸਮਝਾਇਆ ਕਿ ਉਹ ਕਰਦੇ ਨੇ ਇਹਨਾਂ ਇੱਕ ਦਿਨ ਨਾ ਹਸ ਰਿਹਾ ਹੈ ਸਤਗੁਰੂ ਉਹਦੇ ਜ਼ਿਕਰ ਕੱਢਦੇ ਸਾਰੇ ਉਹਦਾ ਅਕੀਡਿਟੀਮ ਬਣਾ ਹੀ ਬੈਠਾ ਉਹਦੀ ਕੋਈ ਗੋਸ਼ ਨਹੀਂ ਹੈਗਾ ਨਾ ਉਹ ਰਾਮਰਾਜ ਆਰਾਮ ਨਾਲ ਤੂੰ ਦਰਸ਼ਨ ਕਰ ਤਾਉਂ ਵੀ ਉਹਦੇ ਦਰਸ਼ਨ ਕੀ ਮਿਲੂਗਾ ਤੇਰੇ ਕੋਲ ਕੀ ਨਹੀਂ ਜਿਹੜਾ ਰਾਮ ਸਿੰਘ ਕੋਲ ਸੀਗਾ ਰਾਮ ਸਿੰਘ ਕੋਲ ਸੀ ਸੀ ਉਹਦੇ ਦਰਸ਼ਨ ਕਿਉਂ ਕਰਾਂ ਤਾ ਤੇਰੇ ਦਰਸ਼ਨਾਂ ਵਿੱਚ ਕਿਉਂ ਨਹੀਂ ਕੋਈ ਕੁਝ ਆਪਣੇ ਆਪੇ ਫਸੇ ਛੱਡੋ ਉਹਨਾਂ ਦੀ ਗੱਲ ਰਹਿ ਜਿਹੇ ਦੀ ਸੰਗਤ ਆ ਉਹਦੇ ਸਤੂਰ ਨੇ ਸੰਗਤ ਕਿਹੜਾ ਬਹੁਤ ਹੈ ਜਿਹੜਾ ਸਕੂਲ ਹੋਊ ਬੱਚੇ ਹੋਣਗੇ ਉਹਦੇ ਟੀਚਰ ਹੋਣਗੇ ਸਕੂਲ ਛੋੜੇ ਵੀ ਨਾ ਬੱਚਿਆਂ ਦੇ ਮਤਲਬ ਹੈ ਬਹੁਤ ਨਹੀਂ ਸਕੂਲ ਲੈਣ ਉਹ ਵੀ ਛੋੜੇ ਬੱਚਿਆਂ ਨੇ ਪ੍ਰਾਇਮਰੀ ਤੇ ਸਟਾਰਟ ਹੋ ਨੇ ਐ ਵੀ ਵਟੇ ਸਕੂਲਾਂ ਦੇ ਵਿੱਚ ਬਿਸਕੁਰਪ ਚੰਦਕ ਜਿਹੇ ਸਭ ਲੋਕ ਸੁਆਹ ਹੋਇਆ ਦੇਖਿਆ ਜਹੇ ਜਾ ਸਤਪੁਰਕ ਜਹੇ ਜੀ ਸੰਭਦਾ ਹੋਇਆ ਸਤਪੁਰਕ ਉਤਾ ਜਹ ਜਾ ਸੰਭਦ ਹੋਊਗੀ ਡਿਮਾਂਡ ਹੋਊਗੀ ਨਹੀਂ ਸੰਗ ਸਿੱਖ ਉਧਰੇ ਨਾਨਕ ਹਰਗੁਰ ਗਾਉਂ ਸਤਗੁਰ ਦੀ ਵੀ ਕੀਤੀ ਸਤਪੁਰਖ ਜੀ ਨੇ ਜਾਣ ਲਿਆ ਉਹਨੂੰ ਸਤਗੁਰ जा सकता है, ਸਤਗੁਰ ਪਹਿਲਾਂ ਵੀ ਵਧੇਰੀ ਮੰਡੀ ਲੱਗੀ ਹੁੰਦੀ ਹੈ ਪਹਿਲਾਂ ਵੀ ਵਧੇਰੇ ਸਤਗੁਰ ਹੋਣੇ ਨੇ ਤਾਂ ਕਿ ਹੈ ਸਤਗੁਰ ਜਿਸ ਦਾ ਨਾਮ ਨਹੀਂ ਲੋੜਦੀ ਸੀ ਕਹਿਣ ਦੀ ਘਰ ਘਰ ਸਤਗੁਰ ਪਾਣੇ ਬੈਠੇ ਹੋਣੇ ਨੇ ਕਿਉਂ ਸਤ ਸੰਗਤ ਜਿਹੜਾ ਕਰਾਉਂਦਾ ਸਤਗੁਰ ਹੁੰਦਾ ਹੀ ਹੈ ਜੇ ਜੀ ਜਾ ਕੇ ਸੰਗਤ ਕਰੋਗੇ ਸਤ ਸੰਗਤ ਚੋਂ ਆਇਆ ਤਾਂ ਸਤਗੁਰ ਤਾਂ ਆਪੇ ਹੋ ਸੱਚ ਨਾਲ ਜੋੜ ਸਕਦਾ ਸਤਿਗੁਰ। ਜੋ ਸਤਿਪੁਰਖ ਹੋਣੇ ਜਾਣ ਲਿਆ। ਸਤਿਪੁਰਖ ਦਾ ਦਰਸ਼ਨ ਕਰਾਉਣ ਵਾਲਾ ਹੀ ਸਤਿਗੁਰ ਹੈ। ਸਤਿਪੁਰਖ ਦੀ ਕਥਾ ਕਰਨ ਵਾਲਾ ਸਮ ਕਥਤ ਕਰਨ ਵਾਲਾ ਸੁਭਝਾਉਣ ਵਾਲਾ ਸਤਿਪੁਰਖ ਹੀ ਹੁੰਦਾ ਸਤਿਗੁਰ ਹੈ। ਸੱਚ ਦਾ ਗਿਆਨ ਦੇਣ ਵਾਲਾ ਸਤਿਗੁਰ ਹੈ। ਸਤਿਗੁਰ ਇਸ ਫਿਰ ਉਹਦੇ ਨਾਲ ਗਾਹਾਂ ਕੀ ਹੈ ਕਿਸੇ ਸੰਤ ਸਿੱਖੁੱਤਰੇ ਜਿਹੜਾ ਸਿੱਖਾ ਉਹਨੇ ਕੋਲ ਜੇ ਤਾ ਬੂਰਖੰਦ ਕੋਲ ਆ ਫਿਰ ਉਹ ਨੂੰ ਮੰਨ ਕੇ ਉੱਥੇ ਰਹੂਗਾ ਕਿਉਂ ਨਿਹਾਰ ਕਰਨਾ ਨਹੀਂ ਨਾ ਉਹਨੇ ਆਦਰ ਕਰਨਾ ਨਾ ਉਹ ਨੂੰ ਆਦਰ ਵੀ ਲੋੜ ਹੈ ਕੋਈ ਬੇਚਾ ਕਾ ਕੀੜਾ ਆਦਰ ਦਾ ਓਹੋ ਉਹ ਤਾਂ ਬਸ ਦਾ ਕੀ ਡਾਟ ਆਇਆ ਧਰੀ ਹੈ ਮਾਇਆ ਦਾ ਤੇ ਹੈ ਉਪਰੇ ਉਦਰੇ ਗਏ ਹਾਂ ਉਪਰੇ ਉਦਰੇ ਗਏ ਆਪਾਂ ਤੇ ਕੋਈ ਗੱਲ ਹੈ ਗਲ ਤੱਕ ਡੁੱਬਿਆ ਹੋਇਆ ਬਾਹਰ ਆ ਜਾਓ ਉਹ ਤੁਹਾਨੂੰ ਗਲ ਤੱਕ ਬਾਹਰ ਆ ਗਿਆ ਪਾਣੀ ਚ ਡੁੱਬਿਆ ਹੋਇਆ ਜਾਂ ਗਲ ਤੱਕ ਬਾਹਰ ਆ ਜਾਂਦਾ ਨੱਕ ਅੱਖਾਂ ਕੰਨ ਜਾਂ ਅੰਦਰ ਰਹੋਗੇ ਕੰਮ ਕਰਨਾ ਨਹੀਂ ਆਉਂਦਾ ਨਾਕਰੀ ਸਾਹਿਬ ਵੀ ਆਉਣ ਲੱਗ ਜਾਂਦਾ ਹੈ ਪ੍ਰੇਸ਼ਾਦੀ ਘੋੜਾ ਚੱਲੀ ਜਾਂਦੀ ਹੈ ਉਹ ਜਿਵੇਂ ਆ ਪਰਬ ਦੇ ਅੰਦਰ ਜੋ ਬਾਹਰ ਆਉਂਦਾ ਹੈ ਬਾਹਰ ਆ ਜਾਂਦਾ ਜੋ ਪਰਿਪਰੰਧ ਪਹਿਲਾ ਘਰ ਦੇ ਜਿਹਨੇ ਰਹਿਣਾ ਜਾ ਰਿਹਾ ਮੂਰਤੀ ਕੋਈ ਜਾ ਰਿਹਾ ਮੰਨ ਰਿਹਾ ਵੀ ਮੂਰਤੀ ਦਾ ਦਰਸ਼ਨ ਹੁੰਦਾ ਹੁੰਦਾ ਹਨ ਕਿ ਜਾ ਰਿਹਾ ਐਸੀ ਨਿਕਾਲੋ ਪਿਸ਼ਾਸ ਪੂਰਾ ਸੀ ਜੇਕਰ ਜਲ ਸਤਿਗੁਰੂ ਮਿਲਿਆ ਨਾਂ ਤੋ ਉਪਰੇ ਉਧੇ ਉਪਰੇ ਕੋਈ ਨਹੀਂ ਇਹ ਮੇਰੀ ਧਾਰਨਾ غلط ਹੈ ਅਸਲ ਤੇ ਜਿਹੜੀ ਮੂਰਤੀ ਮੇਰੀ ਹੈ ਮੇਰਾ ਸਰੀਰ ਹੈ ਉਹਨਾਂ ਨਾਲ ਹੈ ਨਾ ਬਈ ਗੁਰਦਾਂ ਤੇਰੀ ਜਿਹੜੀ ਮੂਰਤੀ ਹੈ ਨਾ ਸੱਚੀ ਹੈ ਆ ਜਿਹੜਾ ਤੇਰਾ ਸਰੀਰ ਹੈ ਇਹ ਸੱਚੀ ਮੂਰਤੀ ਹੈ ਝੂਠੀ ਕੋ ਮੂਰਤੀ ਵੀ ਮੂਰਤੀ ਹੈ ਝੂਠੀ ਹੈ ਉਹ ਇਹ ਤਾਂ ਮੂਰਤੀ ਸੱਚੀ ਹੈ ਤੇ ਸਾਚੀ ਮੂਰਤ ਖਾ ਸਕਦੀ ਹੈ ਕਿਸੇ ਨੂੰ ਸਜ਼ਾ ਦੇ ਸਕਦੀ ਹੈ ਕਿ ਮੂਰਤ ਸਾਚੀ ਹੈ ਤਾਂ ਕਰਨਾ ਆਵੇ ਥਾਉਂ ਖਾਦਾ ਹੀ ਹੀ ਕਰਦੀ ਹੈ ਇਹ ਮੂਰਤੀ ਸਾਚੀ ਹੈ ਤੇ ਝੂਠੀ ਮੂਰਤੀ ਨੂੰ ਪੂਜਦਾ ਤੇਰੇ ਵਾਲੀ ਦਰਸ਼ਨ ਹੋ ਜੂ ਉਹ ਚੋ ਜੂ ਤੈਨੂੰ ਤੇਰੇ ਅੰਦਰੋਂ ਦਰਸ਼ਨ ਹੋ ਗਿਆ ਸੁਭਜਾਈ ਤੂੰ ਤੇ ਅਕਲ ਚ ਆ ਗਈ ਤੂੰ ਆਪ ਦੁਰ ਕੇ ਆਇਆ ਤੇਰੀ ਮੂਰਤੀ ਤੁਰੇ ਫਿਰਦੀ ਹੈ ਉਹ ਤਾਂ ਤੁਰ ਨਹੀਂ ਸਕਦੀ ਕਦਰ ਸਮਝ ਆ ਗਈ ਬਸ ਉੱਪਰ ਦਾ ਮਤਲਬ ਇਹੀ ਹੈ ਉੱਤੇ ਆ ਉੱਪਰ ਇਹ ਕੋਈ ਗੱਲ ਸਮਝ ਆ ਗਈ ਇਹ ਗੱਲ ਸੀ ਉੱਪਰ ਆ ਗਿਆ ਉੱਪਰ ਆ ਗਿਆ ਫਿਰ ਫੈਸਿਲਿਟੀ ਸੀ ਪੂਰਤੀ ਪੂਰਿਆ ਛੱਡ ਗਿਆ ਸਰ ਅਬਲੇ ਹਰੀ ਕੋਲ ਆਪਣੇ ਦਿਵਾੜੀ ਦਾ ਦਵਾਰ ਜਦ ਮਾਸਤੇ ਦੇਖ ਕੀ ਕਰਨਾ ਕੀ ਗੋ ਜੈਸਾ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਫਿਰ ਕਹਿੰਦਾ ਇਹ ਤਾਂ ਜਾਣਨ ਹੁੰਦਾ ਗੁਰੂ ਗ੍ਰੰਥ ਕੋਲ ਕਿਉਂਕਿ ਅਧਾਰ ਆਪਣੇ ਅੰਦਰ ਸੀ ਗਿਆਨ ਤੇ ਬਣਾ ਉਹ ਮੰਨੇ ਬੈਠਾ ਤਾਂ ਬਿਨਾਂ ਗਿਆਨ ਤੇ ਵੀ ਹੈਗਾ ਮੂਰਤੀ ਚ ਜਾਂ ਤੋਂ ਬਿਨਾਂ ਬੈਠਾ ਸੁਣੀ ਸੁਣਾਈ ਗੱਲ ਤੇ ਉਹ ਕਹਿੰਦਾ ਗਿਆਨ ਤੋਂ ਬਿਨਾਂ ਦੱਸ ਦਿੰਦਾ ਸਾਰਿਆਂ ਦੇ ਐਵੇਂ ਮੰਦੀ ਜਾਂਦਾ ਨਾ ਮੂਰਤੀ ਕੋਲ ਬਈ ਉਹ ਜੋ ਉੱਪਰ ਹੋਈ ਗੱਲ ਕਹੀ ਉੱਪਰ ਹੋਈ